ਦੱਖਣੇ ਮਹੱਲਾ ਪੰਜਵਾਂ ਲੋੜਿੰਦੋ ਹੱਬ ਜਾਏ ਸੋ ਮੀਰਾ ਮਿਰਨ ਸਿਰ ਹੱਠ ਮਜਾਹੂ ਸੋ ਤਣੀ ਜਿਹੜਾ ਹਰ ਜਗ ਦਾ ਜਿਹਦੀ ਲੋੜ ਐ ਸਤੂ ਐਸ ਲੋਕ ਤੇ ਪਰ ਦੋਈ ਜਗ੍ਹਾ ਲੋੜ ਐ ਉਹਦੀ ਹੱਬ ਜਾਏ ਜਦੋਂ ਆਪਾਂ ਕਹਿੰਦੇ ਤਾਂ ਲੋਕ ਪਰਲੋਕ ਦੀ ਗੱਲ ਆ ਗਈ ਸਮਝੋ ਉਹ ਵੀਰ ਲੋਕ ਪਰਲੋਕ ਜਿਹੜੀ ਲੋੜ ਆ ਉਹ ਮੇਰਾ ਵੀਰ ਮੈਂ ਉਰੂ ਮੀਰ ਕਹਿੰਦਾ ਪਾਤਸ਼ਾਹ ਕਹਿੰਦਾ ਸਰਚਾਲ ਪਾਤ ਵੀਰ ਅੰਦ ਵੀਰ ਅੰਦ ਤੇ ਸਰ ਵੀਰ ਇਹਦੀ ਛਾਂ ਦਾ ਛਾ ਚਲਤ ਛਾ ਜਿਹਨੂੰ ਕਹਿੰਦੇ ਛਾਂ ਸਿਰ ਪਾਤਸ਼ਾਹ ਉਹ ਹੈ ਮੇਰਾ ਜਿਹੜਾ ਲੋਕ ਪਰਲੋਕ ਦੇ ਵਿੱਚ ਹਰ ਪ੍ਰਕਾਰ ਦੀ ਸਾਡੀ ਠੀਕ ਹੈ ਮੀਰੀ ਸ਼ਬਦ ਵੀ ਇੱਥੋਂ ਆਇਆ ਹੋਊਗਾ ਜੀ ਆਪੇ ਰੀ ਮੀਰੀ ਮੀਰੀ ਸੰਸਾਰੀ ਜਿਹੜੇ ਦੇ ਰਾਜੇ ਉਹਨੂੰ ਕਹਿੰਦੇ ਨੇ ਹਾਂਜੀ ਅਸੀਂ ਲੋਭ ਤਾਂ ਨਾਲੇ ਰੁਕੀ ਕਿਉਂਕਿ ਗੈਰਹੀ ਇਹ ਕਹਾ ਹੈ ਸਾਡਾ ਜਿਹੜਾ ਵੀਰ ਹੈ ਉਹ ਲੋਭ ਤਾਂ ਹੁੰਦਾ ਸਾਰਿਆਂ ਦਾ ਹੁੰਦਾ ਅਰਥ ਜਿਵੇਂ ਉਹ ਨੇ ਆਪਣੇ ਹਰਬ ਦੇਸ਼ ਦੇ ਠੀਕ ਹੈ ਉਹ ਸੰਸਾਰੀ ਧਨ ਵਾਲੇ ਆਪਾਂ ਵੀ ਇਹ ਆਦਮੀ ਕਹਿੰਦੇ ਹਾਂ ਹਾਂਜੀ ਠੀਕ ਸੋ ਜਾਹੂ ਸੋਤਣੀ ਦੋ ਮੁਖ ਅਲਾਈ ਹੱਟ ਹਿਰਦੇ ਦੇ ਵਿੱਚ ਅੰਦਰ ਹੱਟ ਲਫਜ਼ ਜਿਵੇਂ ਨਾ ਜਿੱਥੋਂ ਸੌਦਾ ਖਰੀਦੀਦਾ ਹਾਂ ਤਾਂ ਅਟੜੀਏ ਬਦਬੁਰ ਜਾਰਾ ਹਾਂਜੀ ਇਹਦਾ ਹੱਟ ਪਾਸੇ ਉੱਤੇ ਬੁਦੀ ਕਰਦਾ ਉਹ ਤੜੀ ਹਿਰਦੇ ਚ ਰਹਿੰਦਾ ਸੌਦੀ ਹੱਟ ਹਿਰਦੇ ਚ ਮੇਰੇ ਬਾਸਤੇ ਵੀਰ ਉਹ ਹੈ ਮੇਰੇ ਬਾਸਤੇ ਪ੍ਰਭ ਉਹ ਲੋਕਾਂ ਬਾਸਤੇ ਕੋਈ ਨਹੀਂ ਠੀਕ ਹੈ ਇੱਥੇ ਹੱਠ ਦਾ ਮਤਲਬ ਹੱਠ ਕਰਨਾ ਹੱਠ ਯੋਗ ਦੀ ਇਹ ਸਿੱਧੀ ਹੈ ਨਾ ਭਾਸ਼ਾ ਹਾਂਜੀ ਭਾਸ਼ਾ ਦਾ ਫਰਕ ਹੈ ਨਾ ਠੀਕ ਹੈ ਹੱਠ ਮਜਾਹੂ ਸੋਤਣੀ ਉਦੀ ਜਿਹੜੀ ਠੱਟੀ ਹੈ ਉਹ ਹਿਰਦੇ ਚ ਹੈ ਜੀ ਚ ਜਿਵੇਂ ਹਿਆਲੀ ਹੈ ਹਿਰਦੇ ਚ ਬਸ ਹੈ ਚੌਦੋਂ ਮੁਖ ਲਾਈ ਬੋਲਦਾ ਨਾ ਉਹ ਜਦ ਬੋਲਦਾ ਚਾਹ ਉਹ ਇਹਦੇ ਅੰਦਰ ਬੋਲਦਾ ਉਹ ਨੂੰ ਚੌ ਚੜ ਜਾਂਦਾ ਐਂ ਕਹਿ ਲੋ ਬਾਗੋ ਬਾਗ ਹੋ ਜਾਂਦਾ ਉਹ ਠੀਕ ਐ ਐ ਤਾਂ ਨਹੀਂ ਗੱਲ ਵੀ ਜੇ ਮੈਂ ਉਹਦੀ ਗੱਲ ਕਰਾਂ ਤਾਂ ਮੈਨੂੰ ਚੌ ਚੜਦਾ ਉਹ ਹੀ ਗੱਲ ਐ ਜਦੋਂ ਬੋਲਦਾ ਸਾਨੂੰ ਬੁਲਾਉਣ ਵਾਸਤੇ ਹੀ ਬੋਲਦਾ ਉਹ ਚਾਹੇ ਇਹ ਕਹੇ ਲੋ ਉਹ ਬੋਲਦਾ ਚਾਹੇ ਜੱਜ ਬੁਲਾਉਂਦਾ ਵੇ ਬੋਲ ਨਾ ਕਹੇ ਲੋ ਗੱਲ ਤਾਂ ਇੱਕੋ ਹੀ ਐ ਕਿਉਂਕਿ ਉਹ ਐਂ ਵੀ ਬੋਲਦਾ ਵੀ ਮੈਂ ਸੁਣਦਾ ਉਹ ਬੋਲਦਾ ਭਲਾਇਆ ਬੋਲੇ ਖਸਮ ਉਹਨੇ ਬੋਲਣ ਦਾ ਮਸਲਾ ਹੈ ਮੈਨੂੰ ਬੁਲਾ ਰਿਹਾ ਹੈ ਉਹ ਆ ਬੋਲ ਕੇ ਮੈਂ ਉਹਦੀ ਗੱਲ ਸੁਣ ਕੇ ਸੁਣਤੇ ਪੁਰੀਤ ਸੁਣੀ ਹੋਈ ਗੱਲ ਪੁਰੀਤ ਹੈ ਉਹ ਕੰਨਾਂ ਨਾਲ ਨਹੀਂ ਸੁਣੀ ਜਾਂਦੀ ਪੁਰੀਤ ਉਹ ਬਾਣੀ ਜਿਹੜੀ ਤੁਸੀਂ ਕਹਿੰਦੇ ਬਾਵਾ ਬਾਣੀ ਦਾ ਨਰਕਾਰ ਹੈ ਸੁਣੀ ਕਹਿੰਦੇ ਹਟੇ ਉਹ ਬਾਣੀ ਪੁਰੀਤ ਹੈ ਨਰਕਾਰ ਹੈ ਜਿਹੜੀ ਨਰਕਾਰ ਬਾਣੀ ਹੈ ਬਿਰਤੰਡੀ ਸੁਣੀ ਹੋਈ ਜਿਹੜੀ ਮੈਂ ਬੋਲੀ ਹੈ ਇਹ ਪਵਿੱਤਰ ਹੈ सुनते ਪਰੀਤ ਕਹਤੇ ਪਵਿੱਤ ਜੋ ਵੈ ਬੋਲੀਓ ਪਵਿੱਤਰ ਹੈ ਹੋਜੀ ਮਹੱਲਾ ਪੰਜਵਾਂ ਮਾਨਕੂ ਮੋਹੇ ਮਾਓ ਦਿਨਾ ਧਣੀ ਆਪਾਹੇ ਯਾਉ ਮਹੰਜਾ ਠੰਡੜਾ ਮੁਖੋਂ ਸੱਚ ਅਲਾਈ ਗੁਣ ਗਾਇਨ ਜਿਹੜੀ ਗੁਰਬਾਣੀ ਬਤ ਵਿੱਚ ਰਤਲ ਜਵਾਰ ਵਰਕ ਜੇਕ ਗੁਰ ਕੀ ਸਿੱਖ ਸੁੜੀ ਜਿਹੜੀ ਉਹ ਗੱਲ ਹੈ ਉਹਦੀ ਇਹ ਪਲਟ ਕੇ ਸਿੱਧੀ ਜਿਹੜੀ ਉਹਦੀ ਦਾਤ ਏ ਜਵਬ ਦੀ ਦਾਤ ਹੈ ਉਹ <td>ਦੇ ਹੀਰੇ ਮੋਤੀ ਦਿੰਦਾ ਉਹ ਗੁਰੇ ਗੁਣਾ ਦੀ ਵਰਖਾ ਕਰਦਾ ਉਹ ਗੁਣ ਦੀ ਵਰਖਾ ਕਰਦਾ ਗੁਣ ਗਾਇਨ ਕਰਦਾ ਤੇ ਜਿਹੜੀ ਇਹ ਹੈ ਉਹਦੀ ਮੱਤ ਦਿੰਦਾ ਤੇ ਉਹ ਹੀਰੇ ਮਾਨਕ ਮੋਤੀ ਦਿੰਦਾ ਲੋਕਤਨ ਠੀਕ ਹੈ ਦਿਨਾਂ ਧਣੀਆਂ ਪਾਹੇ ਹਾਂ ਉਹ ਮੋਤੀ ਦਿੰਦਾ ਉਹ ਕਿੰਨੇ ਦਿੰਦਾ بس ਇਹ ਵੀ ਇਤਾਰਾਦ ਦੀ ਹੈ ਉਹ ਗਣ ਕਹਿ ਦਿੱਤਾ ਹੈਗਾ ਵੀ ਆ ਇੱਧਰ ਲੈ ਲੈ ਉਹ ਸਬੂਦਰ ਦੀ ਛਲਵਾਉ ਦੱਦਾ ਹੈ ਸਾਹਮਣੇ ਹੁੰਦੇ ਜਿੱਦਾਂ ਦੱਦਾ ਉਹ ਹਾਂਜੀ ਸਿਆਉ ਮਹਿੰਜਾ ਠੰਡੜਾ ਮੈਂ ਉਹਦੇ ਗੱਲ ਸੱਚ ਦੀ ਕਰਦਾ ਮੇਰਾ ਹਿਰਦੇ ਚ ਠੱਡ ਪੈ ਜਾਂਦੀ ਜਿਉ ਜੋ ਮੈਂ ਉਹਦੀ ਬੁਲਾਇਆ ਹੋਇਆ ਬੋਲਦਾ ਸੱਚ ਬੁਲਾਉਂਦਾ ਨਾ ਸੱਚੀ ਬਾਣੀ ਉਹਦੀ ਜਿਹੜੀ ਇਹ ਬਾਣੀ ਦੀ ਸਚ ਬੋਲਦਾ ਮੈਂ ਸਚ ਦੀ ਗੱਲ ਕਰਦਾ ਮੇਰੇ ਅੰਦਰ ਸੱਚ ਫਟ ਪੈਂਦੀ ਆ ਪਰ ਜਿਹੜੇ ਬੋਲ ਭੁੱਖਦੇ ਨੇ ਛੁੜ ਕੇ ਵਿਛੂ ਵੀ ਲੜ ਜਾਂਦੇ ਤੂੰ ਵਾਂਗੂ ਵੀ ਲੜਦਾ ਐ ਦੀ ਗੱਲ ਕਰਦਾ ਤਾਂ ਅੰਦਰ ਠੰਡ ਪੈਂਦੀ ਹੈ ਜੀ ਯੂ ਟਿਊਬਰ ਬੋਲਦਾ ਤਾਂ ਸ਼ਾਂਤ ਹੋ ਜਾਂਦਾ ਠੰਡ ਪੈਦੀ ਜਾਂਦੀ ਠੀਕ ਹੈ ਜੀ ਰੇਸ਼ਨਾ ਦੀ ਅੱਗ ਆਪੇ ਗੁਝਦੀ ਚਲੀ ਜਾਂਦੀ ਹਾਂ ਜੀ ਮਹੱਲਾ ਮੂੰthiao थी आओ, pri नैना पिरी, dekhe जे var ta sukh kimma ho bahri atta kehnde palaka te bithaal मैं ohnu apni palakan te jehdi andar di akh hai oh vi sej ohde vaste bichhai hoyi hai hird da samjho hai ji hird e keh oh sej ਰਸਨਾ ਦਾ ਨਾ ਬੁੱਧ ਉੱਪਰ ਆ ਗਿਆ ਰਹਉ ਬੁੱਧ ਤੇ ਤੇਰੀ ਜਿਹੜੀ ਅਕਲ ਹੈ ਉਹ ਵੀ ਵਿਚਾਰਦੀ ਆਪ ਆ ਕੇ ਵਿਵੇਕ ਆ ਗਿਆ ਤਾਂ ਬੁੱਧ ਵਿਵੇਕ ਹੋ ਗਈ ਵਿਵੇਕ ਬੁੱਧ ਜਦ ਵਿਵੇਕ ਆ ਕੇ ਬਹਿ ਗਿਆ ਤਾਂ ਬੁੱਧ ਵੀ ਵਿਵੇਕ ਹੋ ਬੁੱਧ ਤੇ ਉੱਤੇ ਐਡੀ ਰੋਸ਼ਨੀ ਕਰਤੀ ਉਹਨੇ ਆ ਕੇ ਪਾਤੀ ਤੇ ਬੁੱਧ ਚੋਂ ਭਰਮ ਦਾ ਨਾਸ ਹੋ ਗਿਆ ਜੀ ਮੂੰਠਿਆ ਉਸੇ नैणा पीरी बिसावणा जे देखै हिक वार ता सुख कीमा हु बाहरे जे एक वार भी ओ देख लेवे इदर भेर दी जड़ा कर दवे बस फिर सुख केदे ने, ने? सुख सागर ही आ गया सुख सागर के समझ मिल गया सुख का सागर आ सागरे आ गया सागर समुद्र जेड़ा हुंदा बाउंड्री सागर दी बाउंड्री दी हुंदी ओ सुख सागर है बा जे ਦੇਖਿਆ ਇੱਕ ਵਾਰ ਤਾਂ ਸੁਖ सुख ਹੂੰ ਬਾਹਰੇ। ਉਹ ਸੁਖ ਸਾਧਰ ਮਿਲ ਗਿਆ ਜੇ ਇੱਕ एक ਉਹ ਬੇਰ ਦੀ ਡਰਾ ਕਰ ਦਵੇ। ਜੜੀ ਕਿਣਕਾ ਏਕ ਜਿਸ ਜੀਵ ਸਾਵਾ ਬਾਕੀ ਵੇਖੋ ਗੜੀ ਰੋ। ਉਹ ਤਾਂ ਇੱਕ ਵਾਰ ਕਿਣਕਾ ਹੀ ਦਊਗਾ ਆਪਣੀ ਬੱਤ ਦਾ। ਮੇਰੇ ਵਾਸਤੇ ਸੁਖ ਸਾਧਰ ਹੈ ਉਹ। ਮੇਰੀ ਬੱਤ ਕਿਉਂ ਦਰਸ਼ਨ ਪਾਈਆ ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਮੇਰਾ ਬਰਲੋਚਾ ਦਾ ਹੀ ਮਨ ਲੋਛਦਾ ਲੋਚਾ ਰਹੀਂਦੀ ਬਰਲੋਚਾ ਮੇਰਾ ਬਰਲੋਚਾ ਦੀ ਭਾਂਜਾ ਬਤਨ ਕੌਮਨ ਸਭ ਦੇ ਨੂੰ ਲੋਛਦਾ ਸਾਰੇ ਕੋਈ ਨਾ ਕੋਈ ਕਿਸੇ ਨਾਲ ਬਤਨ ਜੁੜਿਆ ਹੁੰਦਾ ਕਿਸੇ ਦਾ ਮਨ ਨਹੀਂ ਹੈਗਾ ਜੇ ਇਹਨਾਂ ਨੂੰ ਹੋਵੇ ਕੋਈ ਪਰਮੇਸ਼ਰ ਗੱਦੂ ਗੜੇ ਆ ਮੈਂ ਉਸਾ ਦਰਸ਼ਨ ਕਰਾਂ ਬੰਦੇ ਕਿ ਲੋਚ ਸਮਝ ਗਈ ਠੀਕ ਹੈ ਮੰਨ ਲੋਚੇ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆਂ ਪਰ ਭਾਵੇਂ ਕਿਵੇਂ ਦਰਸ਼ਨ ਕਰਾਂ ਤਾਂ ਲੋਚਾ ਤਾਂ ਸਮਝਦੇ ਹੰਦਾਰੇ ਫਿਰ ਲੋਚਾ ਪੂਰੀ ਕਿਉਂ ਨਹੀਂ ਹੁੰਦੀ ਪੂਰੀ ਕਿਵੇਂ ਹੋਵੇ ਉਹ ਅੱਗੇ ਹੁ ਦੱਸੂਗੇ ਦਰਸ਼ਨ ਕਿਵੇਂ ਪਾਈਦਾ ਹੈ ਪਾਇਆ ਕਿਹਨੇ ਹੈ ਦੂਜੇ ਨੇ ਕਿਉਂ ਨਹੀਂ ਪਾਇਆ ਇਹਦਾ ਫਰਕ ਦੱਸਣਗੇ ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ ਵੇ ਲੱਖ ਵਿੜਤੇ ਸਾਹਿਬਾ ਮੈਂ ਲੱਖਵਾਰ ਵਾਰੀ ਜਾਮਾ ਸਾਹਿਬ ਦੇ ਜੇ ਮਨ ਚਿੱਤ ਨੂੰ ਕਹਿ ਰਿਹਾ ਜੀ ਸਾਹਿਬ ਨੂੰ ਕਹਿ ਰਿਹਾ ਮਨ ਹਾਂ ਹਾਂ ਬੰਦ ਸਭ ਦਾ ਹੀ ਲੋਜਦਾ ਹੈ ਅਸਲ ਦੇ ਵਿੱਚ ਬਾਹਰੋਂ ਜਿਹੜੇ ਟੋਲਦੇ ਨੇ ਅੰਦਰੋਂ ਟੋਲਦੇ ਨੇ ਉਹਨਾਂ ਦਾ ਫਰਕ ਹੈ ਬੁਲਾਉਣ ਦੀ ਗੱਲ ਵੀ ਕੋਈ ਕਰਦੇ ਕਛੜ ਦੀ ਗੱਲ ਸਾਰੇ ਕਰਦੇ ਨੇ ਲੋਜ ਦੇ ਦੇ ਬੁਲਾਉਣ ਦੀ ਗੱਲ ਗੁਰਬਾਣੀ ਵਾਲੇ ਕਰਦੇ ਨੇ ਠੀਕ ਹੈ ਵੀ ਸਾਖੀਆਂ ਬਣ ਸਾਨੂੰ ਨਾਮਦੇਵ ਦੀ ਲੈ ਲਓ ਧੱਲੇ ਦੀ ਲੈ ਲਓ ਬੋਲਾ ਬੁਲਾਉਣ ਦੀ ਗੱਲ ਨਹੀਂ ਆਈ ਦਰਸ਼ਨ ਦਿੱਤੇ ਗਾਇਬ ਬੁਲਾਉਣ ਦੀ ਗੱਲ ਗੁਰਬਾਣੀ ਕਰਦੀ ਉਹਨੇ ਬੁਲਾਇਆ ਇੱਕ ਵਾਰ ਬੁਲਾ ਦਵੇ ਹਰੋ ਇੱਕ ਛਿਰਵਾ ਤੇ ਵੀ ਬਲਾਲ ਬਲਾਦ ਬੇਬਦੀ ਮੇਰੇ ਸੱਚ ਸੁਪਰੇ ਉਪਰੜਾ ਹੈ ਕਿ ਜੇ ਪਿੱਛੇ ਰਹੂ ਬਸ ਇੱਕ ਸਕਿੰਟ ਦਾ ਵਾਲਾ ਹੀ ਬੋਸ ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇਵੜ ਨਾ ਸਾਈਂ ਮੈਂ ਚਾਰੇ ਕੁੰਡਾਂ ਭਾਲ ਲੀਆਂ ਧਰਤੀ ਦੀਆਂ ਚਾਰੇ ਪਾਸੇ ਤੇਰੇ ਵਰਗਾ ਕਿਤੇ ਬਾਹਰ ਮਿਲਿਆ ਬਾਹਰ ਬਾਹਰ ਦੀ ਕਿਤੇ ਮਿਲਿਆ ਮਨ ਚਿੱਤ ਦੀ ਉਹ ਗੱਲ ਕਰ ਰਹੇ ਹਾਂ ਜੀ ਹਾਂ ਸਾਹਿਬ ਨਾਲ ਸਬੋਧਨ ਹੋ ਰਿਹਾ ਠੀਕ ਹੈ ਸਰ ਸਿਰ ਤੋਂ ਬਾਤ ਦੀ ਗੱਲ ਹੈ ਹਾਂ ਇੱਥੇ ਦਰਸ਼ਨ ਹੋ ਗਿਆ ਹੋਣਾ ਜੀ ਹਾਂ ਬਿਲਕੁਲ ਦਰਸ਼ਨ ਹੋਏ ਤਾਂ ਕੱਲ ਤੋਂ ਉਹਦੇ ਨਾਲੇ ਗੱਲ ਸਾਹਿਬ ਨਾਲ ਠੀਕ ਹੈ ਜੀ ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆਂ ਹਾਂ ਹਾਂ ਸੰਤਾਂ ਨੂੰ ਕਾਹਦੇ ਦੱਸਿਓ ਮਾਰਗ ਪ੍ਰਭੂ ਕਿਵੇਂ ਬਣਦਾ आप ਕਹੇ दर्शन ਹੋ ਗਏ ਹੁਣ ਸੰਤਾਂ ਨੂੰ ਮਾਰਗ ਦੱਸ ਰਹੇ ਆ ਪ੍ਰਭੂ ਨੂੰ ਕਿਵੇਂ ਮਿਲ ਕੇ ਆਇਆ ਮੈਂ ਨਹੀਂ ਨਹੀਂ ਨਹੀਂ ਰਹੀ ਫਿਰ ਤੇ ਪੜੋ ਇੱਕ ਵਾਰ ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਂ ਹਾਂ ਹਾਂ ਸੇ ਸੰਤ ਜਦੋਂ ਤੁਸੀਂ ਦੱਸੋ ਪ੍ਰਭੂ ਕਿਵੇਂ ਇਹਨਾਂ ਕੋ ਹੋ ਵੀ ਦਰਸ਼ਨ ਹੋ ਗਿਆ ਨਾਮਦੇਵ ਨੂੰ ਇਹਨਾਂ ਕੋ ਹੋ ਵੀ ੱੱਲੇ ਨੇ ਛੱਟ ਕਰ ਲਿਆ ਵੀ ਤੂੰ ਰੋਟੀ ਖਾਣੇ ਦਾ ਤਾਂ ਖਾਊਗਾ ਪ੍ਰਭੂ ਦੇ ਮਾਰਕ ਬਿਲ ਦਾ ਵੀ ਦੀ ਦੱਸੋ ਸਮਝਾਓ ਮੈਨੂੰ ਵੀ ਦੱਸੋ ਮਨ ਅਰਪਿਓ ਤਜੋ ਇਤ ਪੰਥ ਜੁਲਾਈਆਂ ਜਵਾਬ ਦਿੱਤਾ ਆਪ ਜਵਾਬ ਨਹੀਂ ਮਿਲਿਆ ਤਾਂ ਕਈ ਜਿਹੜਾ ਐਸਾ ਹੀ ਹੈ ਸਵਾਲ ਕੀਤਾ ਜਵਾਬ ਕੁਰਬਾਨੀ ਦੇ ਦਿੱਤਾ ਸਤੋ ਬੋਵੋ ਜੀ ਹਾਂ ਵੀ ਮੈਂ ਸੰਤਾਂ ਨੂੰ ਦੱਸ ਰਿਹਾ ਸੰਤਾਂ ਨਹੀਂ ਤਾਂ ਲੱਭਣਾ ਪ੍ਰਭੂ ਨਹੀਂ ਨਹੀਂ ਨਹੀਂ ਨਹੀਂ ਸਹੀ ਸਹੀ ਸਤੋ ਦਾ ਵਧੀਆ ਹੁੰਦਾ ਫਿਰ ਸਤੋ ਸਬੂਧਾ ਨਾਲ ਸੁਤਾਨ ਤਾਂ ਸਿਓ ਬਿਡੂ ਤਾਂ ਸਿਓ ਸਤੋ ਸਾਧਾ ਨੇ ਤਾਂ ਜਿਸਨਾ ਹੋਣੀ ਕੋਈ ਹੈ ਹੋਈ ਭਗਤਾਂ ਦੇ ਥੱਲੇ ਰੇਟ ਬਣੀਏ ਕੋਈ ਕੁਰਬਾਨੀ ਸੰਤਾਂ ਦੇ ਥੱਲੇ ਲੈ ਨੀ ਰੱਖਣੀ ਹੈ ਸਾਧ ਨੇ ਕਿਹੜਾ ਦੱਸਿਆ ਤਾਂ ਸੰਤਾਂ ਦੇ ਥੱਲੇ ਰੇਟ ਹੋਣੀ ਸੀ ਕੁਰਬਾਨੀ ਹੋਣੀ ਤੋ ਇਹ ਤਾਂ ਹੁਣ ਚੌਥੇ ਪਦਾਰਥ ਦੀ ਗੱਲ ਕਰ ਰਹੇ ਆ ਕਿਉਂਕਿ ਦੋ ਤਾਂ ਮਿਲ ਗਏ ਆ ਦਰਸ਼ਨ ਤਾਂ ਹੋ ਗਿਆ ਪੁੱਛਿਆ ਸਵਾਲ ਕੀਤਾ ਤੋ ਵੀ ਦੱਸੋ ਬੈਡੂ ਗੱਲ ਗੱਲ ਤਾਂ ਤੁਸੀਂ ਦੱਸ ਦੋ ਜਿਵੇਂ ਆਪਾਂ ਕਹਦੇ ਤੇ ਕੀਤੇ ਨੇ ਜੇ ਅਸੀਂ ਗਲਤਾਂ ਤੁਸੀਂ ਦੱਸ ਦੋ ਇਹ ਨਹੀਂ ਗਿਆ ਕਿ ਜੋ ਬੋਟਾ ਤਾਂ ਠੀਕ ਹੈ ਪ੍ਰਭ ਤੋਂ ਤਾਂ ਗੱਲ ਵੱਧ ਗਈ ਗਾਹਾਂ ਗਈ ਹੈ ਜੀ ਆ ਰਿਹਾ ਪ੍ਰਭੂ ਦਾ ਮੇਨੂ ਦੀ ਗੱਲ ਜਿਹੜੀ ਹੈਗੀ ਅ ਸ਼ਬਦ ਗੁਰੂ ਨਾਲ ਮਿਲਣ ਦੀ ਗੱਲ ਹੈ ਹਾਂਜੀ ਗੱਲ ਤਾਂ ਹੈ ਭਾਰਗ ਤਾਂ ਇੱਕੋ ਹੀ ਹੈ ਚਾਰ ਮਾਰਗ ਦੇ ਬਦਲਿਆ ਨਹੀਂ ਹੈ ਭਾਰਗ ਇੱਕੋ ਹੀ ਹੈ ਪੰਥ ਇੱਕੋ ਹੀ ਹੈ ਪੰਥ ਨੂੰ ਰਾਂਗੋ ਦੇ ਪੰਥ ਹੀ ਵੱਲਿਆ ਹੈ ਮਨ ਅਰਪਿਓ ਹਉਮੈ ਤਜੋ ਪੰਥ ਜੁਲਾਈਆਂ ਆਏ ਗੱਲ ਬਣ ਅਰਪੋ ਭਰ ਕੇ ਅਰਪੀ ਦਾ ਬੰਦੀ ਜੈ ਸਿਰ ਆਪਣਾ ਬੰਨ੍ਹ ਲਈਦਾ ਗੁਰ ਵਿੱਚ ਸਤਿਗੁਰ ਕੇ ਪਾਸ ਨਹੀਂ ਮਰ ਵਿੱਚਿਆ ਕਿਸੇ ਸੰਤ ਨੇ ਸੰਤ ਨਹੀਂ ਕਹਾ ਸਕਦਾ ਸੀ ਆਪ ਸੰਤ ਤਾਂ ਸੰਤ ਆਪ ਕਹਿੰਦੇ ਸੀ ਸੰਤ ਤਾਂ ਦਿੱਕਤ ਇੱਥੇ ਆਈ ਹੈ ਨਾ ਸ਼ੁੱਧ ਕਹੂਵੇਂ ਨੇ ਹੋ ਆਪਣੇ ਆਪ ਨੂੰ ਦਾਸ ਵੀ ਕਹੋਂਦੇ ਜੇ ਵਕਈ ਤੁਸੀਂ ਸੰਤ ਹੈਗੇ ਹੋ ਤਾਂ ਦੱਸੋ ਮਾਰਗ ਤੁਸੀਂ ਕਿਉਂਕਿ ਪਹੁੰਚ ਗਏ ਨਾ ਫਿਰ ਉੱਥੇ ਸ਼ਾਂਤੀ ਮਿਲ ਗਈ ਨਾ ਤੁਹਾਨੂੰ ਮਾਰਗ ਦੱਸੋ ਪ੍ਰਭੂ ਦੁੱਖਾਂ ਮੈਂ ਮਿਲਿਦਾ ਅਦੂਰੀ ਆਦੇ ਇਹ ਸੰਦਲ ਤੋਂ ਆਪਾਂ ਲੈਣੀ ਹੈ ਗੱਲ ਜੇ ਕੋਈ ਸੰਤ ਕਹੋਦਾ ਤਾਂ ਉਹ ਦੂਜੇ ਨੂੰ ਮਾਰਗ ਦੱਸੂਗਾ ਦੱਸਣਾ ਚਾਹੀਦਾ ਜੋ ਕਹਿੰਦਾ ਦੱਸਣਾ ਦੀ ਜੇ ਮਤਲਬ ਉਹ ਠੀਕ ਨਹੀਂ ਕਹਿ ਰਿਹਾ ਗੱਲ ਠੀਕ ਹੈ ਜੀ ਮਨ ਅਰਪਿਓ ਹਉਮੈ ਤਜੋ ਪੰਥ ਜੁਲਾਈਆਂ ਇਹਦਾ ਹਣਾ ਸੰਤਾਂ ਨੇ ਉਹ ਨਹੀਂ ਹੋਈ ਬੋਧਾਰ ਪਹਿਲੀ ਹੋਇਆ ਤੁ ਜਿਆ ਤੋਂ ਬੱਥਾ ਟਕਾਣਾ ਕੇ ਪੁਆਰ ਪੁਜਾਰ ਹੈ ਵੀ ਜਿਹੜੇ ਨੇ ਰਹੁਬੇ ਤੇ ਜੀ ਹੋਈ ਆ ਨਾ ਮਰਾਲ ਪਿਆ ਹੋਇਆ ਸਤਿ ਗਾਈ ਜਾਂਦੇ ਯਾਰ ਆ ਆਪਣੇ ਦਾਸ ਹਾਂਜੀ ਜੁਲਾਈਆਂ ਦਾ ਕੀ ਭਾਵ ਹੁੰਦਾ ਇੱਕ ਪੰਥ ਜੁਲਾਈਆਂ ਅੱਗੇ ਅੱਗੇ ਬਦਣਾ ਚੱਕਾ ਠੀਕ ਹੈ ਜੀ ਨਿਤ ਸੇਵਿਓ ਸਾਹਿਬ ਆਪਣਾ ਸਤ ਸੰਗ ਮਿਲਾਈਆਂ ਦੇਤ ਸੇਵੋ ਸਾਹਿਬ ਆਪਣਾ ਆਪਣੇ ਸਾਹਿਬ ਨੂੰ ਦੇਤ ਸੇਵੋ ਜੇ ਤੁਸੀਂ ਉਹਦੇ ਪਾਣੀ ਚੱਲੋ ਤੇ ਹੁਕਮ ਚੱਲੋ ਹੀ ਸੇਵ ਹੈ ਬਸ ਇਹੀ ਵੇਲੇ ਉਹਦੇ ਨਾਲ ਵੇਜੋ ਮੈਂ ਜਾ ਕੇ ਉਹਦੇ ਪਾਸ ਪਾਣੀ ਜੁੜ ਜਾਓ ਪੇ ਰਹਿਣ ਵਾਲਾ ਉਹਦੀ ਸੰਗਤ ਹੈ ਜਿਹੜੀ ਉਹ ਕਦੇ ਵੀ ਦਾ ਸੁਣਨ ਵਾਲੀ ਦੀ ਫੇਰ ਉਹਦੇ ਨਾਲ ਜਿਹੜਾ ਜੁੜ ਜਾਂਦਾ ਜੋ ਜਨ ਜਾਣ ਗਿਆ ਪਰਖੋਤਮ ਜਿਸका ਲਿਆ ਪਰਕੁਤਗੁਰਖੂ ਔਰ ਜਾਣ ਕੇ ਸਮਝ ਕੇ ਜੁੜ ਗਿਆ ਫਿਰ ਉਹ ਸਤਸੰਗਤ ਉਹਨੂੰ ਕਹਿੰਦੇ ਨੇ ਸੱਚ ਨਾਲ ਜੁੜ ਗਿਆ ਫਿਰ ਿਤਸਕਾ ਕਛੂ ਨਾ ਨਾਚਾ ਹੋਰ ਈ ਕਦੇ ਮਰਿਆ ਫਿਰ ਈ ਕਦੇ ਜਬੇ ਹਾਂਜੀ ਸਬੇ ਆਸਾਂ ਪੂਰੀਆਂ ਗੁਰ ਮਹਿਲੀ ਬੁਲਾਈਆਂ ਤੂੰ ਤੇ ਜੇਵੜ ਹੋਰ ਨਾ ਸੁਝਈ ਮੇਰੇ ਮਿੱਤਰ ਗੋਸਾਈਆਂ ਸਭੇ ਆਸਾਂ ਪੂਰੀਆਂ ਦੀਆਂ ਸਾਰੀਆਂ ਚਾਹਵ ਪੂਰੀਆਂ ਹੋ ਜਾਂਦੀਆਂ ਤੇ ਕੋਈ ਬਹਿਲੀ ਬਰਾਈਆਂ ਜਦੋਂ ਨੇ ਆਪਣੇ ਮਹਿਲ 'ਚ ਬੁਲਾ ਲਿਆ ਸਤਿਗੁਰੂ ਦੇ ਆਪਣੇ ਮਹਿਲ 'ਚ ਬੁਲਾ ਲਿਆ ਫਿਰ ਕੁੱਟੀ ਛੁੱਟੇ ਦਸਮੇ ਦਵਾਰ ਦੇ ਪਿੱਛੇ ਬੁਲਾ ਲਿਆ ਸਾਰੀ ਇੱਛਾ ਪੂਰੀਆਂ ਹੁੰਦੀਆਂ ਕਰਤਾ ਤੇਰੇ ਸਭ ਕੁਝ ਆਉਂਦੇ ਘਰ ਸਭ ਕੁਝ ਹੀ ਹੈ ਤੇ ਹਾਂਜੀ ਤੂੰ ਤੇ ਹੋਰ ਨਾ ਸੁਝਈ ਮੇਰੇ ਮਿੱਤਰ ਗੋਸਾਈਆਂ ਤੇਰੇ ਮਿੱਤਰ ਗੁਸਾਈਆਂ ਮਾਲਕਾ ਬੇਰਿਆ ਤੇਰੇ ਵਰਗਾ ਹੋਰ ਮੇਰੀ ਸਮਝ ਤਾਂ ਹੋਰ ਕੋਈ ਹੈ ਨਹੀਂ ਜਿੱਤੇ ਤੱਕ ਮੇਰੀ ਸੋਝੀ ਹੈ ਤੇ ਤੂੰ ਸੁਝਾਏ ਤੇਰੇ ਜੇ ਜੇਵੜ ਹੋਰ ਕੋਈ ਹੈ ਨਹੀਂ ਇਹ ਕਿਹਨੂੰ ਕਿਹਾ ਹੈ ਪਰਵੇਸ਼ ਨੂੰ ਕਿਹਾ ਹੈ ਅੱਛਾ ਜੀ ਇਹ ਹੁਣ ਚਿੱਤ ਕਹਿ ਰਿਹਾ ਹਾਂ ਜੀ ਤੁਧ ਹੋਰ ਨਾ ਸੁਝਾਈ ਮੇਰੇ ਮਿੱਤਰ ਗੁਸਾਈ ਹੋ ਕੇ ਕਹਿ ਰਿਹਾ ਕੱਲਾ ਚਿੱਤ ਨਹੀਂ ਹੁੰਦਾ ਕੋੜ ਬ੍ਰह्म ਕਹਿ ਰਹੇ ਅੱਛਾ ਚਿੱਤ ਤਾਂ ਅਸੀਂ ਯਾਦ ਕਰਾਂਗੇ ਜਾਂ ਤਾਂ ਫਿਰ ਪੂਰਨ ਬ੍ਰਮ ਆਪਾਂ ਕਹੋਗੇ ਜੇ ਜਦ ਇੱਕ ਹੋ ਕੇ ਬੋਲਦਾ ਨਾ ਇੱਕ ਹੋਇਤਾ ਉਗਵੈ ਫਿਰ ਉਹ ਚਿੱਤ ਨਹੀਂ ਕਹਿੰਦੇ ਉਹਨੂੰ ਇੱਕ ਵਾਂ ਦੀ ਚਿੱਤ ਕਹਿ ਸਕਦੇ ਹੋ ਠੀਕ ਹੈ ਜੀ ਹਾਂ ਇੱਥੇ 12ਵੀਂ ਪੌੜੀ ਦੀ ਸਮਾਪਤੀ ਹੈ ਜੀ